ਹਾਂਜੀ ਲਹਿਣੇ ਦੀ ਫੇਰ ਫੇਰਾਈਏ ਨਾਨਕਾ ਦੋਹੀ ਖੱਟੀ ਐ ਜੋਤ ਓਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀ ਐ ਹਾਂ ਲਹਿਲੇ ਰਾ ਟਕਲੇਟ ਕਰਤਾ ਲਹਿਲੇ ਰੂਪ ਇਹਦੇ ਗੱਟੀ ਘੱਟ ਲਈ ਇਹਦੇ ਤਤ ਗਿਆਨ ਪ੍ਰਾਪਤ ਕਰ ਲਿਆ ਇਹਦੇ ਜਿਹੜੀ ਅਵਸਥਾ ਤੁਰਿਆ ਪਹੁੰਚ ਗਿਆ ਲੈਣਾ ਇਹ ਨਾ ਬੋਲਣਾ ਕਦੇ ਇਹ ਸਾਰੀ ਸੰਸਕ੍ਰਿਤੀ ਵਿੱਚ ਐਲਾਨ ਕਰਤਾ ਤੇ ਦੋਹੀ ਅੱਛਾ ਜੀ ਘਟਿਆ ਵੀ ਇਹਨੇ ਘਟਲੀ ਭਾਈ ਇਹਦੇ ਜੈਨੂ ਪਦਾਨਤ ਖੱਟ ਲਿਆ ਠੀਕ ਹੈ ਉਹ ਤੋਂ ਲੈਣਾ ਮੈਂ ਕਰੂਗਾ ਪਰ ਯਾਰ ਇਹਦੀ ਜ਼ਿੰਮੇਵਾਰੀ ਹੈ ਇਹ ਨੋ ਬੰਦੋ ਉਹਨੂੰ ਮੇਰੇ ਤੋਂ ਜਿਹੜਾ ਮੇਰਾ ਸੇਖ ਹੈ ਉਹ ਜੂਗਾ ਗੁਰੂ ਉਹ ਮੇਰਾ ਸੇਖ ਹੈ ਨਾ ਇਹਨੂੰ ਰਹੀ ਬੈਲੂਗਾ ਮੇਰਾ ਸੇਖ ਨਹੀਂ ਅੱਛਾ ਜੀ ਵੀ ਗੇ ਤੇਰੀ ਗੱਲ ਪੱGLE ਪੈ ਗਈ ਹੈ ਤੇ ਸਮਝ ਲਈ ਹੂੰ ਹੂੰ ਫੇਰਾਈਏ ਦਾ ਕੀ ਮਤਲਬ ਹੁੰਦਾ ਜੀ ਕਿ ਲੈਣੇ ਦੀ ਫੇਰਾ ਫੇਰਾਈਏ ਹੈ ਖਰਾਤੀ ਤੋਰੀ ਭੇਰਤੀ ਹੋਦੀ ਖਾਰੇ ਗੌੜੀ ਡਿਕਲੇਅਰ ਕਰਤਾ ਸਾਡੇ ਦਸਤ ਵਿੱਚ ਠੀਕ ਹੈ ਜੀ ਸਾਡੇ ਸਾਹਮਣੇ ਸਵੇਰੇ ਠੀਕ ਹੈ ਜੀ aadme se door bhi si kai dehi di jande ode us vele khad rahi si taarya nu kehta bhai oh ve lede mere to ohna nu eh nahi lave siri jannu tere panno lag jande acha ji june ji eh gall ohna ne elan karti apne junde ji eh gall ohna ne elan karti ਈ ਬਣੀ ਠੀਕ ਹੈ ਨਾਲ ਪਿੱਛੋਂ ਦਾ ਚੜਨਾ ਪੈ ਜਾਣਾ ਸੀ ਉਹ ਪਤਾ ਨਹੀਂ ਸੀ ਕਿਤੇ ਹੋਈ ਜੀ ਜਿਹੜਾ ਇਹ ਜਰੂਰ ਰਾਜੇ ਨੂੰ ਰਾਜ ਦਈਦਾ ਹਾਂਜੀ ਬਿਲਕੁਲ ਠੀਕ ਹੈ ਜੀ ਬੇਟਾ ਸਕੇ ਬੈਠੇ ਰਹੇ ਤਾਂ ਠੀਕ ਹੈ ਜੀ ਤੇ ਜੋ ਤੋ ਆ ਕਾਇਆ ਫੇਰ ਪਲਟੀ ਹੈ ਅੱਛਾ ਜੀ ਜਾਵਤੂ ਪਰਮੇਸ਼ਰ ਨੇ ਕਾਇਆ ਅਵਸਥਾ ਚ ਲੈ ਕਾਇਆ ਪੱਡਲ ਦਾ ਮਤਲਬ ਇਹ ਵੀ ਹੈਗਾ ਵੀ ਗੁਰਨਾਨਦ ਖੋਦੇ ਸ਼੍ਰੀ ਉਹਦਾ ਹਿਰਦਾ ਬਦਲਦਾ ਉਹਤ ਬਦਲਦੀ ਅੱਛਾ ਜੀ ਪਰਮੇਸ਼ਰ ਤੋਂ ਹੁਦੀ ਬਦਲਦੀ ਕਹਿੰਦਾ ਇਹ ਵੀ ਬਦਲਦੀ ਹੋੜੋ ਬਦਲਦੀ ਸਤ ਪਾਈ ਇਹਨੂੰ ਵੀ ਸੋਝੀ ਆ ਗਈ ਸਭਝ ਆ ਗਈ ਠੀਕ ਹੈ ਜੀ ਜਿਹੜਾ ਇਹ ਆਮ ਪ੍ਰਚਾਰਦੇ ਆਂ ਵੀ ਜੋਤ ਉਹਦੇ ਚ ਪਾਤੀ ਆ ਉਹ ਕਰਤੀ ਉਹ ਗੱਲ ਬਿਲਕੁਲ ਝੂਠੀ ਹੈ ਜੀ ਐਤਾ ਆ ਜੋਤ ਉਹਦੇ ਠੀਕ ਹੈ ਜੀ ਘਰ ਵੀ ਤੇ ਦਰਸ਼ਤ ਵੀ ਹੈ ਜੋਤ ਹੈ ਅੱਛਾ ਜੀ ਆ ਅੱਛਾ ਜੀ ਐ ਝੂ ਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ ਤੱਕਦਾ ਉਹ ਸਰ ਤੇ ਖਤਰ ਤੱਕ ਲੁੜਾ ਜਰੂਰ ਹਾਂਜੀ ਖਤਰ ਵੀ ਚਲਦਾ ਤਖਮੀਆ ਪਰ ਸਾਰਾ ਕੋ ਦੁਰੰਜਣੀ ਹੈ ਦੇਖ ਅੱਖਾਂ ਨੂੰ ਤੇ ਘਰ ਵਾਲੀ ਤੱਕ ਤੈਂਗਾ ਕੋਈ ਨਾ ਖਤਰ ਅੱਛਾ ਜੀ ਖਤਰ ਸੱਤਾਂ ਚਲਦਾ ਤਖਤੇ ਬੈਠਾ ਅੱਛਾ ਜੀ ਤਖਤੇ ਬੈਠਾ ਬਾਅਦ ਵਿੱਚ ਤਖਤੇ ਬੈਠਾ ਹਿਲਦਾ ਤੱਕਦਾ ਕੋਲ ਬੈਠਾ ਟਿਕਿਆ ਹੋਇਆ ਅੱਛਾ ਜੀ ਉੱਤੇ ਕੀ ਹੈ ਉਹ ਤੇ ਦੇ ਹੱਥ ਹੈ ਉਹ ਕੁਬਾਤ ਜਿੱਤੇ ਹੱਥ ਹੈ ਹੁਕਮ ਰੂਪੀ ਦਾ ਆ ਬਾਤ ਹੈ ਉਹ ਆਸਾ ਰੂਪੇ ਹੈ ਹਾਂ ਹਾਂ ਆ ਕੇ ਸ਼ਤਰ ਦੇ ਹੱਥੇ ਜਦੋਂ ਰਾਜੇ ਹੱਥ ਹੈ ਉਹ ਉਹ ਤੇ ਜਾਂਦਾ ਜੇ ਗੁਰ ਫਰਮਾਇਆ ਸਿਲਜੋਗ ਅਲੂਣੀ ਚੱਟੀ ਹੈ ਇਹ ਤਾਂ ਉਹ ਕਰਦਾ ਹੈ ਕਰੇ ਜੋ ਕੋਨ ਫਰਮਾਇਆ ਇਹ ਤਾਂ ਉਹ ਕਰ ਰਿਹਾ ਲੈ ਤਾਂ ਜੋ ਸਾਥੀ ਬੋਲਣ ਫਰਮਾਇਆ ਸੀ ਅੱਛਾ ਜੀ ਇਹ ਤਾਂ ਉਹ ਉਪਦੇਸ਼ ਜੋ ਤੁਹਾਨੂੰ ਕਿਹਾ ਉਹ ਹੀ ਕੋਸ਼ਿਸ਼ ਕਰਦੇ ਆ ਜੋ ਤੁਰ ਕਹਾ ਸਰਕਾਰ ਖਵਾਵੋ ਵੇਨੇ ਜੋ ਉਹਨਾਂ ਦੇ ਧਿਆਉਕਾਰ ਕਮਾਈ ਹੈ ਤਾਂ ਹੈ ਹੈ ਉਹ ਉਹਨੂੰ ਉੱਧਰ ਚੱਡਦਾ ਤੇ ਸੂਰ ਦਾ ਸਵਾਦ ਨਹੀਂ ਆਉਂਦਾ ਜੋਗ ਲਾਉਂਦਾ ਜਿਹੜਾ ਸ੍ਰੀ ਚੰਦ ਦੀ ਗੱਲ ਹੋ ਰਹੀ ਸ੍ਰੀ ਚੰਦ ਦਾ ਉੱਧਰ ਤੇ ਉਹਦੇ ਦਾ ਸਵਾਦ ਨਹੀਂ ਇੱਥੇ ਗੁੱਠਾ ਭਗਵਾ ਕੇ ਪੱਥਰ ਕੋਲ ਜੀ ਦਰਦ ਕਰ ਚੱਲਦਾ ਅੱਛਾ ਜੀ ਮਗੋਂ ਜੇ ਰੋਪ ਦਾ ਸਾਦ ਹੋ ਤਾਂ ਤਾਂ ਚੜਦੇ ਨੇ ਹਾਂਜੀ ਇਹ ਫੇਰ ਵੀ ਸਾਦ ਆਉਦਾ ਨਹੀਂ ਫੇਰ ਵੀ ਜੋ ਕਰੀ ਜਾਂਦੇ ਅੱਛਾ ਸਲੂਣੀ ਹਰ ਚੱਟਣ ਅੱਛਾ ਜੀ ਕੋਈ ਟੈਸਟ ਨਹੀਂ ਠੀਕ ਹੈ ਜੀ ਸਭ ਉਹ ਰੀ ਪਹਰ ਆ ਜਾਂਦਾ ਦਿੱਤ ਨੂੰ ਸਾਹਿਬ era ਦਿੱਤ ਨੂੰ ਦਿੱਤ ਨੂੰ ਇਹਦਾ ਨੂੰ ਜਾਂਦਾ ਦਿੱਤ ਨੂੰ ਇਹਦਾ ਨੂੰ ਹੀ ਗੱਲ ਆ ਜਾਂਦੀ ਹੈ ਦਿੱਤ ਨੂੰ ਵੀ ਇਹਦੀ ਚੀਜ਼ ਬੁਰੀ ਜਾਂਦੀ ਹੈ ਠੀਕ ਖਰਚਾ ਬੇਸੋਟ ਠੀਕ ਹੈ ਜੀ ਇਹ ਕੋਈ ਮਤਲਬ ਲੰਗਰ ਜਿਹੜਾ ਅਖਰ ਹੈਗਾ ਇਹ ਵਰਤਿਆ ਹੋਇਆ ਹੈਗਾ ਸ਼ਬਦ ਸ਼ਬਦ ਦੇ ਨਾਲ ਵਾਸਤੇ ਵਰਤੇ ਨਾ ਕਿ ਜਿਹੜਾ ਆਪਾਂ ਰੋਟੀ ਪਾਣੀ ਦਾ ਲੰਗਰ ਬਣਾਉਂਦੇ ਆ ਅਸੀਂ ਉਹ ਲੰਗਰ ਕਿੱਥੇ ਵਰਤਿਆ ਹੈ ਇੱਥੇ ਰੋਈ ਵਰਤਿਆ ਇੱਥੇ ਰੋਈ ਤੇਰੀਓ ਕੇ ਉਹਦੇ ਖਾਣੋਂ ਉਹਦੇ ਵਾਸਤੇ ਰੋਈ ਵਰਤਿਆ ਹੋਇਆ ਠੀਕ ਹੈ ਜੀ ਲੰਗਰ ਸਿਰਫ ਐਸੇ ਹੀ ਜਗ੍ਹਾ ਵਰਤਿਆ ਪੂਰੇ ਗੁਰਗ੍ਰੰਥ ਸਾਹਿਬ ਚ ਤੇ ਐਸੇ ਦੋ ਜਗ੍ਹਾ ਜਿੱਥੇ ਵਰਤਿਆ ਉਹ ਦੋਹੇ ਜਗ੍ਹਾ ਪਰਮਾਰਥ ਦੀ ਗੱਲ ਜੀ ਲੰਗਰ ਦਾ ਖਾਣ ਲਈ ਕੀ ਆਤਮਾ ਵਾਸਤੇ ਆਤਮਾ ਦਾ ਭੋਜਨ ਆਤਮਾ ਦਾ ਭੋਜਨ ਠੀਕ ਹੈ ਜੀ ਜੇ ਕੋ ਖਾਵੇ ਜੇ ਕੋ ਪੁੱਛੇ ਉਹੀ ਗੱਲ ਹੈ ਇਹ ਵੀ ਹਾਂਜੀ ਹਾਂ ਆ ਰਸੋਈ ਤੇ ਰਸ ਆ ਉਹ ਸਰੀਰ ਦੇ ਤੇਰਾ ਸਰੀਰ ਕੇ ਉਹ ਸਰੀਰ ਦੇ ਰਸ ਠੀਕ ਹੈ ਉਹ ਵੀ ਅੱਗੇ ਆ ਜਾਣਾ ਲੰਗਰ ਚੱਲਦਾ ਹੈ ਹਰ ਕਿਸ ਤਰ੍ਹਾਂ ਇਹਦਾ ਪਦ ਛੇਦ ਕੀ ਹੈ ਠੀਕ ਹੈ ਠੀਕ ਬੜਿਆ ਤੁਸੀਂ ਅੱਛਾ ਹਰ ਤੇ ਰੁਕਣਾ ਜੀ ਹਰ ਤੇ ਆਵੇ ਖੁੱਬ ਅੱਛਾ ਠੀਕ ਹੈ। ਠੀਕ ਹੈ ਜੀ। ਹਰ ਹਰ ਦੇ ਨਾਲ ਜੁੜ ਕੇ ਖਾਦਾ ਹੈ ਕੱਲ ਹੁਣ ਜੁੜ ਕੇ ਖਾਣ ਆਲੇ ਨਹੀਂ ਇਹ ਗੱਲ ਅੱਛਾ ਜੀ। ਸੇਲ ਜੁੜ ਕੇ ਖਾਣ ਵਾਲੀ ਰਸੋਈ ਹੈ ਜਿੱਦਣ ਦਾ ਸੇਲ ਸੋਈ ਨੂੰ ਲੰਦਰ ਕਹਿਤਾ ਸ਼ਬਦ ਦਾ ਲੰਦਰ ਗਾਇਬ ਹੋ ਗਿਆ। ਠੀਕ ਹੈ ਜੀ। ਉਹ ਤਾਂ ਇਹ ਆਈ ਹੈ ਦਾਲ ਪਰ ਪ੍ਰਚਾਤ ਹੈ। ਹਾਂ ਜੀ। ਕਰਤਾ ਹੈ। ਤਰੇ ਨੋਤੋ ਲੇ ਠੀਕ ਹੈ ਜੀ ਤੁਹਾਡੇ ਹੱਥ ਹੋ ਗਏ ਲੱਗ ਰਹੀ ਨਹੀਂ ਆਉ ਬਾਤ ਸ਼ਬਦ ਗਾਇ ਲੁਕੀਰ ਤੋਂ ਠੀਕ ਹੈ ਆਪ ਖੈਰ ਦਬੱਟੀ ਖਰਚੇ ਦਿੱਤੀ ਖਸਮ ਦੀ ਹਾਂਜੀ ਕਰਦਾ ਖਸਮ ਦਿੱਦਾ ਖਾਤ ਕਰਦਾ ਹਾਂਜੀ ਦਰਿਆ ਦਾ ਪਾਣੀ ਹੁੰਦਾ ਪਿੱਛੋਂ ਆਪ ਖਾਂਦਾ ਆਂਦਾ ਆਪ ਖਾਂਦਾ ਹਾਂਜੀ ਨਾਲ ਖਾਇ ਦੁਪੱਟੀਆਂ ਦਬੱਟ ਕੇ ਖੈਰ ਕਰਦਾ ਖੈਰ ਹੁੰਦੀ ਹੈ ਖੈਰਾਤ ਕਰਦੀ ਫ੍ਰੀ ਦੇਗਾ ਜਾਨੀ ਦਾਨ ਮੰਗ ਮੈਂ ਕਿਸੇ ਨੂੰ ਦਾਨ ਦਾਨ ਕਰਨਾ ਠੀਕ ਹੈ ਜੀ ਖੈਰ ਕਹਿੰਦੇ ਖੈਰ ਬੁਸਲ ਬੋਲਦੇ ਨੇ ਬੁਸਲ ਬੰਦੀ ਲਾਉਂਦੇ ਵਰਤਦੇ ਖੈਰ ਹੋ ਹਾਂਜੀ ਆ ਗਿਆ ਕਿਸੇ ਬਾਰੇ ਕੁਝ ਪੁੱਛ ਲਿਆ ਉਹਨੂੰ ਜਵਾਬ ਨਹੀਂ ਲੈ ਜਾ ਜਿਹੜੀ ਪੂਰੀ ਗੱਲ ਹੈ ਤੂੰ ਆਪਣੀ ਠੀਕ ਹੈ ਜੀ ਮੈਂ ਜਿਹੜੇ ਖਾਣ ਵਾਲੇ ਨੇ ਖਾਣਾ ਚਾਹਵੇਂ ਨੇ ਦਬਾ ਕੇ ਕੋ ਦੇ ਰਹੇ ਨੇ ਕਿਨੋਂ ਵਰਗੀ ਖਾਵੇ ਕੋਈ ਠੀਕ ਹੈ ਗਿਆਨ ਦੀ ਗੱਲ ਹੋ ਰਹੀ ਹੈ ਫਿਰ ਗੱਲ ਉਹ ਵਾ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋ ਝਟਿਆ ਉਹ ਵਾ ਸਿਫਤ ਖਸਮ ਦੀ ਅੱਛਾ ਜੀ ਉਹ ਟਿੱਪੀ ਲੱਗੀ ਹੋਈ ਐ ਉਹ ਵੇ ਵਾਤੀ ਜਦੋਂ ਖਸਮ ਜਾਂ ਲਾਫ ਦਾਗਾ ਖਸਮ ਤਾਂ ਅੱਛਾ ਜੀ ਕਿਉਂਕਿ ਪਿਛਲੇ ਵਿੱਚ ਖਰਚੇ ਦਿੱਤ ਖਸਮ ਦੀ ਸੀਗਾ ਇੱਥੇ ਵੀ ਫਿਰ ਤਾਂ ਹੀ ਸ਼ੁਰੂ अच्छा जी acha ji pata nahi dio tiphi lai yaar nu to samajh है aayi hat lagda ta laude ji khass nu shabad hai ga pura je ਕੁਰਸਾ ਅਰਸ਼ ਔਰ ਦੂਰ ਇਹਦੇ ਵਿੱਚ ਅਰਸ਼ ਉਹਦੇ ਤੇ ਹੁੰਦਾ ਹੈ ਕੁਰਸਾ ਸਭ ਤੋਂ ਉਪਰ ਹੁੰਦਾ ਹੈ ਅੱਛਾ ਜੀ ਅਰਸ਼ ਆਕਾਸ਼ ਬੰਨੀ ਦਾ ਲੈਣੇ ਨੂੰ ਹੋ ਰਹੀ ਹੈ ਅੱਛਾ ਜੀ ਸਾਹ ਹੱਥੋਂ ਇਹ ਕੁਰਸਾ ਇਹਦੇ ਆਪਣੇ ਹੱਥੋਂ ਜੋ ਭਾਵੇਂ ਇਹਦੇ ਦੂਰ ਅਰਸ਼ ਆ ਕੇ ਕੁਰਸਾ ਛੱਡੀ वाणी गुरु तो सुन रही है खुद कुर्सी पर जो दे रहे हो अच्छा जी चट्टी है ना जी चट चट दे चलर ढ़र ढ़र चलर जब ਝੜਦੀ ਹੈ ਕੋਈ ਚੀਜ਼ ਕਿਤੋਂ ਜਦੋਂ ਆਕਾਸ਼ ਤੋਂ بارش ਨਹੀਂ ਹੋ ਰਹੀ हां जी ठीक है तो अच्छा जी ਜਿਹੜਾ ਖਾਸ ਅੱਖਰ ਹੈ ਇਹ ਪਰਮੇਸ਼ਰ ਤੁਹਾਨੂੰ ਆਇਆ ਬੇਕਰੂ ਫਰਮਾਨਾ ਬੇਕਰੂ ਫਰਮਾਨਾ ਬਰਸੋ ਕਿਰਪਾਦਾਰ ਅੱਛਾ ਜੀ ਉਹ ਬਰਸੋ ਕਿਰਪਾਦਾਰ ਜਿਹੜੀ ਐਡ ਹੈ ਤਾਂ ਜਿਵੇਂ ਉਹ ਆਇਆ ਉਮਰ ਉਮਰ ਆਇਆ ਕੋਈ ਮੱਕੀ ਤੇ ਜਗਾ ਉਧਰ ਨਾ ਭਏ ਪਾਸਾ ਖੇਪਨ ਲਈ ਅੱਛਾ ਜੀ ਆਲਾ ਵੇਰ ਕਿਹਨੂੰ ਤੋਂ ਆਵੇ ਥੱਲੇ ਦੇ ਭਰਜੇ ਨੂੰ ਪਾੜਿਆ ਹੋਵੇ ਉੱਤੋਂ ਹੀ ਆ ਰਿਹਾ ਬਰਸਦਾ ਹੀ ਹੁੰਦਾ ਉਹ ਠੀਕ ਹੈ ਜੀ ਤੇ ਇਹ ਜਿਹੜਾ ਗਿਆਨ ਹੋਰ ਪੱਕਾ ਇਹ ਜਿਹੜਾ ਗਿਆਨ ਹੈ ਸਾਰਾ ਸਿਫਤ ਖਸਮ ਦੀ ਸਿਫਤ ਹੈ ਬਸ ਹੈ ਜੀ ਹਾਂ ਉਹਦੀ ਉਹਦੀ ਉਹਦੀ ਸਿਫਤ ਖਸਮ ਦੀ ਹੋਈ ਜਾ ਤੇ ਨੂਰ ਦਾ ਮਤਲਬ ਕੀ ਹੈਗਾ ਇੱਥੇ ਗਹਿਰੀ ਅਸਟਾ ਉਹਦੀ ਹੋਣੀ ਤੇ ਦੰਦਾਂ ਦਾ ਬੰਦੰਦਾਂ ਚਿੱਟਾ ਫਿਰਦਾ ਇਹ ਤਾਂ ਛੱਡਾ ਦੇ ਦੇ ਅੱਛਾ ਜੀ ਜੇ ਆਪਾਂ ਦੇ ਦੇ ਇੱਕ ਤਾਂ ਉੱਪਰ ਹੀ ਹੋਦੀ ਹੈ ਥੱਲੇ ਉਹ ਠੀਕ ਹੈ ਜੀ ਤੇ ਇਹ ਜਿਹੜੀ ਸਿਫਟ ਹੈ ਇਹਨੂੰ ਇਹ ਨੂਰ ਕਿਹਾ ਤੇ ਇਸ ਦੇਪ ਤੋਂ ਇਹ ਅੱਛਾ ਜੀ ਉਹ ਗਿਆਨ ਠੀਕ ਹੈ ਜੀ ਇਹ ਆਵਾਜ਼ ਹੈ ਨਾ ਅੱਛਾ ਜੀ ਠੀਕ ਹੈ ਤੁਧ ਡਿੱਠੇ ਤੁਧ ਡਿੱਠੇ ਗਿਆਨ ਵਰਸਾ ਹੋ ਇੱਕ ਮੋਰ ਬਣ ਕੇ ਚਮਕਦਾ ਚਿਹਰਿਆਂ ਤੇ ਉਹ ਹੀ ਦੇ ਰਿਹਾ ਚੰਗਲੁਰਦਰ ਠੀਕ ਹੈ ਜੀ ਹਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਤੀ ਐ ਸੱਚੇ ਪਾਤਸ਼ਾਹ ਤੇਰਾ ਦਰਸ਼ਨ ਗੁਰੂ ਦਾ ਦਰਸ਼ਨ ਕਰ ਲਿਆ ਕਿ ਆ ਜਿਹਨੇ ਗਿਆਨਪੁਰੂ ਦਾ ਦਰਸ਼ਨ ਕਰ ਲਿਆ ਉਸੇ ਜਦੋਂ ਜਬਰ ਦੀ ਦੀ ਠੀਕ ਹੈ ਜੀ ਇਹ ਬੱਲੇ ਪੈ ਗਿਆ ਉਹਦੀ ਠੀਕ ਹੈ ਅਸੀਂ ਸ਼ਾਇਦ ਇਸ ਨੂੰ ਭਲੇਖੇ ਨਾਲ ਸਮਝਦੇ ਹਾਂ ਵੀ ਉਹ ਗੁਰੂ ਬੈਠੇ ਹੈ ਤਾਂ ਉਹਨਾਂ ਦੀ ਤੁਸੀਂ ਫੇਸ ਦੇਖ ਲਿਆ ਬਸ ਇੰਨੇ ਨਾਲੇ ਤੁਹਾਡਾ ਜਨਮ ਜਨਮ ਜਿਹੜਾ ਕੱਟਿਆ ਗਿਆ ਹਾਂ ਜੀ ਉਹ ਸਭ ਕੋ ਦੇ ਅਸੀਂ ਜਦ ਤੱਕ ਉਹ ਪੁਲੇਖੇ ਨੂੰ ਨਹੀਂ ਛੱਡਾਂਗੇ ਜਦ ਤੱਕ ਸਾਨੂੰ ਡਿੱਠੇ ਦਾ ਜਿਹੜਾ ਅਰਥ ਅਸਲੀ ਹੈ ਹੈ ਕਿ ਉਹ ਜਿਹੜਾ ਗਿਆਨ ਹੈ ਜੇ ਉਹਨੂੰ ਹਿਰਦੇ ਵਿੱਚ ਵਸਾਲਿਆ ਤਾਂ ਉਹ ਡਿੱਠਿਆ ਤਾਂ ਆਖੇ ਸਮਝ ਲਿਆ ਠੀਕ ਹੈ ਜੀ ਜੇ ਕੁਝ ਨਹੀਂ ਆਇਆ ਪੈਰਾਮੈਲ ਸ ਕੱਟੀ ਜਾਂਦੀ ਹੈ ਫੇਰ ਭਰ ਜਾਂਦੀ ਹੈ ਜੇ ਬੰਦੇ ਦਾ ਅੱਛਾ ਜੀ ਠੀਕ ਹੈ ਜੀ ਆਹ ਮੈਨੂੰ ਫੇਰ ਮੀਟਾ ਹੋ ਜਾਂਦਾ ਹੈ ਹਾਂਜੀ ਹਾਂਜੀ ਪਰ ਕਪੜਾ ਧੋ ਲਈਏ ਤੇ ਜੇ ਠੀਕ ਹੋ ਗਿਆ ਖੰਡਲੀ ਧੋਤੀ ਇੱਕ ਵਾਰ ਪਊਗਾ ਫਿਰ ਉਹ ਕਪੜੇ ਕਰੀਏ ਕੋਲੋਂ ਇਸਤੇਮਾਲ ਕਰੀਏ ਫਿਰ ਹੋਜੀ ਹੋਣਾ ਸੱਚ ਜੇ ਗੁਰੂ ਫਰਮਾਇਆ ਕਿਉਂ ਐਦਾਂ ਬੋਲੋ ਹੱਟਿਏ ਆਹ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਨੂੰ ਜੀ ਬੋਲ ਅੱਛਾ ਜੀ ਦੇ ਆਖੋ ਸੀ ਬਾਤ ਹਾਂ ਉਹ ਜਦੋਂ ਮੈਂ ਕਹਿੰਦਾ ਸਾਚੀ ਬੋਲਦੇ ਹੁਣ ਮੈਂ ਹੱਥ ਨਾਲ ਤੇ ਪਿੱਛੇ ਸੱਚੇ ਬੋਲੂਗਾ ਜੋ ਵਰਜੀ ਅਸ ਹਾਜਰ ਜੋ ਵਰਜੀ ਹੋਵੇ ਹੁਣ ਅੱਛਾ ਜੀ ਚਲ ਬੈ ਕੋ ਬੈ ਆਪਣੇ ਮੈਨੂੰ ਵੀ ਸਾਚੀ ਬੋਲਦੇ ਭਾਈ ਹਾਂਜੀ ਮੈਂ ਸੱਚੇ ਬੋਲੂਗਾ ਸਾਚੀ ਜੀ ਗੁਰ ਫਰਮਾਇਆ ਗੁਰੂ ਨੇ ਕੀਤਾ ਸਾਚ ਮੋਲ ਨੂੰ ਬਾਪੀ ਵਿਰਜੂ ਦੀ ਰੱਤ ਛੱਡ ਜਾਂਦਾ ਤੂੰ ਦਰਗਾਹਉਂ ਸਾਚ ਬੋਲਦੇ ਬੰ ਮੁੰਨਾ ਸਾਚ ਬੋਲ ਉਹ ਦੋ ਬੋਲਣ ਦੀਆਂ ਬੰਦੀ ਤੇ ਜਾਣਾ ਠੀਕ ਆ ਗੱਲ ਕਹਿ ਤੀ ਕਹਿਣਾ ਕੋ ਨਾਨਕ ਦੇ ਪੁੱਤਾਂ ਨੇ ਤਾਂ ਗੋਨਾਕ ਵੀ ੱਲੇ ਦੀ ਬੰਦੀ ਉਹ ਕਰ ਗਏ ਭਾਈ ਤੁਸੀਂ ਵੀ ਆਲੇ ਹਾਂ ਕਰਨ ਤੇ ਗਏ ਸਾਰ ਪੀਰੋ ਕੰਨ ਬੁੜੀਏ ਪੀੜ ਕੰਨ ਬੜਵਾ ਪੀਰ ਦੇ ਚਲੇ ਬਣ ਗਏ ਪੀਰ ਉਹ ਜਿਹਦਾ ਕੰਨ ਬੜਵਾਇਆ ਵੀ શ્રી ਚੰਦ ਉਹ ਪੀਰ ਜੀ ਦਾ ਸਿੱਧ ਨਹੀਂ ਸੀ ਬਾਤ ਦੀ ਅੱਛਾ ਜੀ ਜਦੋਂ ਆਥਾ ਨੇ ਮੁਸਲਮਾਨਾਂ ਨਾਲ ਕੱਪੜਾ ਕਰ ਲਿਆ ਸੀ ਉਹ ਸਿੱਧਾ ਵੇਚ ਕੱਪੜਾ ਵਾਇਲ ਕਰ ਲਿਆ ਦੀ ਆਥਾ ਹੈ ਅੱਛਾ ਅੱਛਾ ਜੀ ਪੇਕਾ ਪਰ ਮਾਈਕ ਵਿਆਦਾ ਢੋਡਾਤਾ ਸਾਡਾ ਉਹ ਕਹਿੰਦੇ ਪੇਰ ਸਾਡਾ ਰਹੂਗਾ ਪੀਰ ਸਾਡਾ ਵੀ ਅਸੀਂ ਕਰਨ ਉਹ ਤੇ ਕਲਾਕਾ ਥੋੜਾ ਪਾਣੀ ਥੋੜੀ ਬਾਣੋ ਸਾਡਾ ਅੱਛਾ ਜੀ ਸਾਡਾ ਉਹ ਨਾਦ ਕਾ ਹੈ ਉਹ ਪੀਰ ਕਾ ਹੈ ਦੇ ਅੱਛਾ ਜੀ ਥੋੜੀ ਦੇ ਪੀਰ ਸੁਰ ਨਾਦ ਜਿੱਦਾਂ ਪੀਰ ਨੂੰ ਲੱਗ ਗਿਆ ਪੀਰ ਉਹ ਸੁਰ ਨਾਦ ਹੈ ਅੱਛਾ ਜੀ ਕਿਉਂਕਿ ਪਾਠਾ ਬਸਲਵੰਦੀ ਤਰਬੋ ਬਲਵੰਦੀ ਵਰਦੇ ਇਸ ਕਰਕੇ ਪੀਰਦੇ। ਸਾੜ ਕੋ ਹਾਂ ਆਲਾ ਪੇਰੇ ਨਾ। ਠੀਕ ਹੈ। ਹਰ ਫੇਰ ਉਹ ਕੰਨ ਕੋ ਰੋਟੀਆਂ। ਕੰਨ ਦੀ ਮੋਰੀ ਕਢਵਾ ਕੇ ਉੱਤਰ ਪੀਰ ਦਾ ਕੇ ਲਾਪੜ ਗਿਆ। ਮੁਰਟੀਆਂ ਦਾ ਮਤਲਬ ਮੋਰੀ ਹੈ ਜੀ। ਹਾਂ। ਦਾ ਮਤਲਬ ਮੁਰਟੀਆਂ ਦਾ ਮਤਲਬ ਕੀ ਹੁੰਦਾ? ਕਢਾ ਲੈਣੀ। ਬੋਰਾ ਉਹਨਾਂ ਛੱਡ ਕੇ ਉੱਤਰ ਪਾਉਂਦੇ ਹਾਂਜੀ ਠੀਕ ਹੈ ਜੀ। ਅੱਜ ਜੋ ਹੋ ਕਾਫੀ ਮੋਟੀ ਦੇ। ਹਾਂਜੀ ਕਾਫੀ ਮੋਟੀ ਮੋਟਾ ਕਾਫੀ ਮੋਟਾ ਉਹ ਕੰਨ ਛੀਦਦੇ ਆ। ਆਹ ਹਾਂ ਉਹ ਉਹ ਛੇ ਅੱਛਾ ਲਿਆ। ਠੀਕ ਹੈ ਜੀ। ਦਿਲ ਖੋਟੇ ਦਿਲ ਖੋਟਾ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਹੈ। ਅੱਛਾ ਜੀ। ਉਹ ਆਨੇ ਖੋਟ ਹੈ। ਹਾਂਜੀ। ਉਹ ਕਹਦੇ ਸੱਚਪ੍ਰਤਿਖ ਖੋਟ ਹੈ। ਸੱਚ ਦੀ, ਸੱਚਮਾ, ਸੱਚੇ ਮਾਰਗ ਨੂੰ ਖੋਟਾ ਮਾਰਗ ਬਣ ਰਖਾਣ ਲੱਗ ਪੜਿਆ ਹੋਇਆ ਹੈ। ਠੀਕ ਹੈ ਜੀ। ਇਹ ਯਾਰ ਸੱਚ ਦਾ ਮਾਰਗ ਹੈ ਇਹਦੇ ਖੋਟ ਰੌਣ ਵਾਸਤੇ ਸਾਜਿਸ਼ ਕਰ ਰਹੇ ਨੇ। ਲੱਗੇ ਹੋਏ ਨੇ ਜਗਾਟਾਂ ਦਿਲ ਖੋਟੇ ਆਕੀ ਆਕੀ ਦਾ ਮਤਲਬ ਹੁੰਦਾ ਹੈ ਵੀ ਉਹ ਰਿਵੋਲਟ ਚ ਫਿਰ ਰਹੇ ਹਨ ਦੁਖੀ ਫਿਰ ਰਹੇ ਹਨ ਆਕੀ ਦੇ ਭਾਣੇ ਤੋਂ ਆਕੀ ਨੇ ਪਾਣੀ ਮੰਗਦੇ ਹੂੰ ਹੂੰ ਉਹ ਮਤਾਂ ਪੜੀ ਰਹੇ ਸੀ ਉਹ ਉਹ ਤਾਂ ਪੜਨ ਦਿੰਦੇ ਸੀ ਤੇ ਮਖਾਤ ਗੁਰੂ ਬਣੇ ਬਨ ਭਾਰ ਉਚਾਈਆਂ ਕੀ ਹੁੰਦਾ ਹੈ ਜੀ ਅੱਛਾ ਜੀ ਜਿਹੜਾ ਇਹ ਤੇਰੇ ਕੋਲ ਆ ਰਿਹਾ ਯੂ ਲੈ ਕੇ ਇੱਥੇ ਰੋੜ ਦੇਣਾ ਜਿਹੜਾ ਉਹ ਉਹ ਬਹੁਤ ਚੱਕਿਆ ਜਿਹੜਾ ਉਰੇ ਠੀਕ ਹੈ ਜੀ ਹਰ ਨਾਮ ਨਹੀਂ ਹੈ ਇੱਕ ਸਰਕੇ ਨਾਮ ਵੀ ਨੱਗੇ ਲਈਏ ਖੋ ਸਰੀਰ ਸਰੀਰ ਦਾ ਬੋਝ ਆ ਠੀਕ ਹੈ ਜੀ ਮੰਨੋ ਠਾਈ ਘੱਟ ਹਾਂਜੀ ਠੀਕ ਹੈ ਤੇ ਜਿਨ ਆਖੀ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨਾਂ ਠੱਟੀ ਐ ਪਿਆਤਾ ਜਿਹਨੇ ਭਾਈ ਆਖੀ ਐ ਗੁਰਬਾਣੀ ਬੋਲੀ ਐ ਹਾਂਜੀ ਉਹ ਕਰਦਾ ਹੈ ਉਹ ਚੱਲਦਾ ਹੈ ਤੇ ਅੱਛਾ ਜੀ ਜਿਹਨੇ ਘਾਰਿਆ ਤਾਂ ਉਹ ਆਪ ਚੱਲਦਾ ਪੈਣਾ ਦਿੰਦਾ ਹਾਂਜੀ ਜਾਂ ਫਿਰ ਜਿਹੜਾ ਬੰਦ ਕੇ ਚੱਲ ਪੈਂਦਾ ਠੱਟੀ ਉਹ ਦਿਖਾ ਦੂਗੀ ਉਹਦੇ ਅੰਦਰ ਦਿਖਾ ਠੀਕ ਹੈ ਜੀ ਕਿਹਨਾ ਵਿਚਾਰੀਆ ਬਣਿਆ ਤਾਂ ਆਪ ਚਲੇ ਆਓ ਜੇ ਜਿਹੜਾ ਚਲੇ ਆ ਹੋਰ ਕੋਈ ਜੇ ਚਲੇ ਆ ਉਹ ਦੇਖਿਆ ਹੋਇਆ ਹੋ ਗਿਆ ਠੀਕ ਹੈ ਜਿੰਨ ਜਿੰਨ ਕੀਤੀ ਕੌਣ ਹੈ ਜੀ ਇਹ ਜਿਹਨੇ ਸਿਫਸਲਾ ਕੀਤੀ ਜੀ ਕੀਤੀ ਠੀਕ ਹੈ ਜੀ ਸਿਫਸਲਾ ਕੀਤੀ ਹੈ ਸਿਫਸਲਾ ਜੀ ਦੇ ਹਾਂ ਜੀ ਬੁਲਾਨ ਕ ਕੀਤੀ ਉਹ ਚਲਿਆ ਹਾਂ ਠੀਕ ਹੈ ਜੀ ਉਧਰ ਉਹ ਕਹਤਾ ਉਹਡੇ ਦੇ ਹੂੰ ਹੂੰ ਤੇ ਪਾਣੀ ਚ ਚੱਲਿਆ ਲੈਣਾ ਉਹ ਬੋਲਦਾ ਕਿ ਵੀ ਪਾਣੀ ਚ ਚੱਲਿਆ ਜੀ ਠੀਕ ਹੈ ਜੀ ਹੁਣ ਕਿਹਾ ਕਿ ਤੇ ਹੁਕਮੇ ਕਿਹਾ ਤੇ ਹੁਕਮ ਚੱਲਿਆ ਫਿਰ ਉਹ ਠੀਕ ਹੈ ਜੀ ਉਹ ਉਹ ਤਾਂ ਵਾਕ ਹੈ ਕੌਣ ਹਾਰੇ ਸੱਤ ਸੱਤ ਕਿਹ ਲੋਕ ਠੀਕ ਹੈ ਜੀ ਤਾਂ ਕੋ ਹੁਕਮ ਉਹ ਵੀ ਚੱਲੇ ਆ ਉਹ ਵੀ ਚੱਲੇ ਆ ਤੇ ਕਬੀੜਿਆ ਇਹ ਥੀੜੀ ਲਾਈਨ ਹੈਗੀ ਐ ਕੌਣ ਹਾਰੇ ਕਿੰਨੂ ਵਟੀ ਨੂੰ ਦਸੀ ਐ ਖਾਰਿਆ ਆਕੀ ਨਾ ਕੋਈ ਹਾਰਿਆ ਨਾ ਕੋਈ ਜਿੱਤੇ ਅੱਛਾ ਜੀ ਇਹ ਤਾਂ ਭਾਈ ਜਿਹੜੇ ਬੰਨ ਲਈ ਜਿਹੜੇ ਹਾਰ ਗਿਆ ਉਹ ਜਿੱਤ ਗਿਆ ਜਿਹੜਾ ਜਿੱਤ ਗਿਆ ਹਾਰ ਗਿਆ ਹਾਰ ਕੇ ਜਿੱਤੇ ਹਾਰ ਐ ਬੁਰਕੇ ਹਾਰੇ ਜਿੱਤ ਅੱਛਾ ਜੀ ਆਣਾ ਗੁਰੂ ਦੇ ਸਾਹਮਣੇ ਹਾਰ ਬੱਝ ਕੇ ਅਜੇ ਹਕੂਮਤ ਦੇ ਸਾਹਮਣੇ ਸੀ ਹਾਰ ਬੱਝ ਕੇ ਹਾਂਜੀ ਆਪਣਾ ਭਾਣਾ ਪਿਆ ਸੀ ਹਾਂਜੀ ਜਿੱਤਲੀ ਬਾਜੀ ਠੀਕ ਹੈ ਜੀ ਜਿੱਤਕਾਰ ਇੱਕ ਪਾਸੇ ਆਦੇ ਤੂੰ ਜਿੱਤ ਗਈ ਜਿੱਤ ਹਾਂਜੀ ਇੱਕ ਪਾਸੇ ਜਿੱਤ ਗਈ ਤੂੰ ਪਾਸਾਰ ਕੇ ਕੌਣ ਹਾਰੇ ਕੌਣ ਚਿੰਨ ਵੱਟੀ ਵੱਟੀ ਮਤਲਬ ਹਾਰ ਹੁਣ ਜਿੱਤ ਹੁੰਦਾ ਤੇ ਕਿਹੜੀ ਭਾਸ਼ਾ ਚੋਂ ਅੱਖਰ ਆਇਆ ਇਹ ਕਵਿ ਮਾਮ ਸੁਣਿਆ ਨਹੀਂ ਆਪਾਂ ਕਦੇ ਇਸ ਤਰ੍ਹਾਂ ਨਾ ਵੱਟੀ ਐ ਵੱਟ ਵੱਟ है, ਲੈ ਲੈਣ ਲਾ ਲੈਣਾ ਹੋ ਠੀਕ ਹੈ ਜੀ ਉਹ ਵੱਟੀ ਐ ਬਾ ਉਹ ਦਾ ਬਾਜੀ ਹਾਰ ਗਿਆ ਬਾਜੀ ਜਿੱਤ ਲਈ ਠੀਕ ਹੈ ਹਾਂ ਹੁਣ ਠੀਕ ਹੈ ਵੱਟੀ ਐ ਤਾਂ ਗੱਲ